शलोक डखणे महल्ला पंचम जो डुबंदो आप सोत राए किनखे तारे डड़ो बीतार नानक फिर रत्तियां आप, ने डुब रहे ने डुबे होए ने ओ तार दणगे ने की तारन कैसे ठगी ਬੰਨ ਫੜ ਕੇ ਲੈ ਜਾਣੀ ਹੈ ਜੇ ਸਾਡੇ ਗੁਰੂ ਰੂਤਾਏ ਹੋ ਜਾਂਣ ਕੋ ਹੋ ਜਾਂਦੇ ਤਾਂ ਕੋਈ ਕਿਸੇ ਨੂੰ ਕਰਤਾਰ ਛੱਡ ਦਿੱਤਾ ਪਰਮੇਸ਼ਰ ਛੱਡ ਦਿੱਤਾ ਬੰਦਾ ਲੈ ਲਿਆ ਹੋਣੀ ਟਾਰ ਸਕਦੇ ਕਿਸੇ ਨੂੰ ਜਿਹੜੇ ਆਪ ਡੁੱਬੇ ਹੋਣ ਉਹਨਾਂ ਦੀ ਵਰਸੀਆ ਮਦਈ ਹੋ ਜਾਂਦੀ ਹੈ ਉਹ ਜਿਹੜੇ ਸਦਾ ਜੀਵਨ ਵਾਲੇ ਨੇ ਉਹਨਾਂ ਦੀ ਵਰਸੀ ਦਾ ਮਤਲਬ ਕੀ ਸਦਾ ਸਦਾ ਆਰਾਧਾ ਵਿੱਚ ਲੱਗੇ ਹੋਏ ਜਿਉਂਦਿਆਂ ਨੂੰ ਵੀ ਕੋਈ ਪਰਮੇਸ਼ਰ ਜਿਉਂਦਾ ਪਰਮੇਸ਼ਰ ਦੀ ਵਰਸੀ ਕੋ ਮਨਾਉਂਦਾ ਜਿਹੜਾ ਪਰਮੇਸ਼ਰ ਦਾ ਰੂਪ ਹੋਊਗਾ ਉਹਨੂੰ ਦੀ ਵਰਸੇ ਕਰਕੇ ਬੁਲਾਈ ਜਾਊਗੀ ਕੰਗੜਿਆਂ ਦਾ ਟੱਬਰ ਇਕੱਠਾ ਹੋਇਆ ਹੈ ਮੇਰੇ ਲੋਬੇ ਜਾਂ ਦਸਤਪਣਾ ਫਿਰ ਗੁਰਮੁਖੀ ਨਜ਼ਰੀ ਆਇਆ ਨਹੀਂ ਕੰਗੜੇ ਹਾਂਜੀ ਤਾਰਨ ਜਿਹੜੋ ਪੀਤਾਰ ਨਾਨਕ ਪਰਸਾਂ ਰੱਤਿਆਂ ਜਿਹਨਾਂ ਨੂੰ ਖਸਮਦਾਰਾਂ ਨੇ ਚੜ ਗਿਆ ਨਾ ਸੱਚਦਾਰਾਂ ਨੇ ਚੜ ਗਿਆ ਉਹ ਜਿਹੜੇ ਆ ਤਾਰਨ ਦੇ ਦਾਅਵੇ ਕਰਦੇ ਨੇ ਇਹਨੂੰ ਉਤਾਰ ਦਿੰਦੇ ਨੇ ਉਹ ਕਾਰਲਦੜ ਉਤਾਰਨ ਵਾਲਿਆਂ ਨੂੰ ਉਤਾਰ ਦਿੰਦੇ ਨੇ ਜਿਹੜੇ ਲੋਕਾਂ ਨੂੰ ਤਾਲ ਲੈਣ ਉਹਨਾਂ ਨੂੰ ਵੀ ਉਤਾਰ ਦਿੰਦੇ ਨੇ ਕੌਣ ਗੁਰਮੁਖ ਜੀਰੂ ਨੂੰ ਸਾਕੇਦਾਰਾ ਵਿਗੜ ਗਿਆ ਉਹ ਉਤਾਰ ਦੇ ਤਾ ਇਹ ਗੱਲ ਤਾਂ ਮੰਨ ਲਾਇਆ ਕਿ ਜਿਹੜੇ ਪਰਮੇਸ਼ਰ ਦੀ ਆਪਾਂ ਵਰਸੀ ਨਹੀਂ ਮਨਾਉਂਦੇ ਫਿਰ ਆਪਾਂ ਬਾਕੀ ਸੰਤਾਂ ਦੀਆਂ ਕਿਉਂ ਮਨਾਉਂਦੇ ਆ ਉਹ ਭਰੇ ਹੋਏ ਨੇ ਤਾਂ ਮਨਾਉਂਦੇ ਨੇ ਉਹ ਤਾਂ ਸਾਬਤ ਕਰਦੇ ਨੂੰ ਵੀ ਮਰ ਗਏ ਉਹ ਜਿਹਨਾਂ ਇਹ ਨਹੀਂ ਪਤਾ ਵੀ ਇਹ ਸਾਬਤੋਂ ਵੀ ਮਰ ਗਏ ਉਹ ਇਹ ਜਨਮ ਦਿਨ ਉਹਦੇ ਸਾਥ ਹੁੰਦਾ ਹੋਰ ਕੋਈ ਸਾਥ ਹੁੰਦਾ ਵੀ ਦੇ ਸਾ ਜੀਵਨ ਹੋ ਗਿਆ ਤੇ ਜੇ ਗੁਰੂ ਨੇ ਗੁਰੂ ਦੀ ਕੋ ਵਰ੍ਹੇ ਮਨਾਇਓਗੇ ਹੁੰਦਾ ਹੈ ਮਨਾ ਵੀ ਆ ਮੁਸਲਮਾਨ ਤਾਂ ਅਮਚ ਵੀ ਮੁਹੰਮਦ ਦੀ ਨਾ ਜਨਮ ਮਨਾਇਆ ਜਾਂਦਾ ਉਹਨਾਂ ਦਾ ਨਾ ਜੋਤੀ ਜੋਤ ਮਨਾਉਂਦੇ ਆ ਤੇ ਜੇ ਕਰਕੇ ਤਾਂ ਨੇ ਹੋ ਹਾਂਜੀ ਤੇ ਸਾਨੂੰ ਉਹਨਾਂ ਸਿੱਖਣਾ ਚਾਹੀਦਾ ਓ ਨੇ ਜਿੱਦ ਕਰਾ ਰਾਮ ਨਾਲ ਘਰ ਤਾਂ ਤਲਵਾ ਰਹੇ ਨਾ ਕੋਈ ਨਹੀਂ ਪਰ ਉਹ ਤਾਂ ਖਾਣੇ ਆ ਪਰ ਅਸੀਂ ਤਾਂ ਜਨਮ ਅਸ਼ਟਮੀ ਰਾਮ ਨੌਮੀ ਦੇ ਪਿੱਛੇ ਲੱਗ ਕੇ ਮਨਾਉਨੇ ਇਹ ਤਾਂ ਅਸੀਂ ਹੋਗੇ ਹੋਈ ਨਹੀਂ ਅੰਨੇ ਆ ਅਸੀਂ ਨੂੰ ਕਹਿੰਦੇ ਦੋਏ ਨੂੰ ਬੁਖਦੇ ਇਸ ਮਹੱਲਾ ਪੰਜਵਾਂ ਜਿੱਥੇ ਕੋਈ ਕਥਨ ਨਾ सुनंदो मां पीरी मुंह जलाऊं नानक पीरी पसंदो हरयो थियोस जिथे कोई कथ्दी तो थरु नो मां पीरी थाने कोई धोखदा कथन करदा होवे ना सच करदा होवे पर मेरा परमेश्वर पति सुन लोवे की है ਕਬੀਰ ਸੁਪਨੇ ਜੂ ਬੜਾਏ ਕਿ ਜੇ ਮੁਕਟਿਕ ਸਹਰਾ ਸੁਪਨੇ ਜੇ ਕਰਦੇ ਨੇ ਸਾਰੇ ਕਥਾ ਇਹ ਕਹਤੇ ਕਿਸੇ ਨੇ ਮੂੰਹੋਂ ਸੱਚ ਨਿਕਲਿਆ ਉਹ ਸਮਝੋ ਜਾਗ ਪਿਆ ਜਾਗ ਕੇ ਤੇ ਮੈਨੂੰ ਸੱਚ ਨਿਕਲਦਾ ਹੀ ਜ਼ਰੂਰ ਚ ਇਹ ਸੱਚ ਨਿਕਲਿਆ ਉਹ ਜਾਗ ਪੈਂਦਾ ਸੁਪਨਾ ਖਤਮ ਹੋ ਜਾਂਦਾ ਔਰ ਬੇਰਾ ਪਰਮੇਸ਼ਰ ਲੋਗ ਇਹਨੂੰ ਸੁਣ ਮੇਰਾ ਪਤੀ ਨੇ ਉਹਨੂੰ ਸੁਣ ਦਰਗਾਹ ਜੋਦੀ ਹੋ ਜਾ ਸੁਣਵਾਈ ਤਾਂ ਹੋਏ ਜਾਣੀ ਉਹਦੇ ਅੰਦਰ ਜੀ ਆਪ ਨੂੰ ਚਲਾਉ ਆਪਣਾ ਆਪਾ ਉਹਦਾ ਆਪਣਾ ਆਪਾ ਤਾਂ ਉਹਦਾ ਜਦੇ ਬਸੂ ਜਾਂਦਾ ਨਾ ਤਾਂ ਦਾ ਆਪੇ ਨਾਮਾ ਨਾਲ ਵਿਰੋਧ ਹੰਕਾਰ ਦਾ ਉਹਦਾ ਜਲ ਜਾਂਦਾ ਨਾ ਜਦੇ ਹੀ ਖਤਮ ਹੋ ਜਾਂਦਾ ਗੂਚ ਹੋ ਨਿਕਲਿਆ ਨਾਮ ਤੇ ਹੰਕਾਰ ਅਰੇ ਬਸ ਗੂ ਬੂ ਤਾਲੁਕ ਐ ਆਪਣਾ ਪੜਨੋ ਦਾ ਮੈਂ ਤਾਂ ਉਹਦੀ ਜਲ ਜਾਂਦੀ ਹੈ ਜਦੇ ਹੀ ਖਤਮ ਹੋ ਜਾਂਦੀ ਹੈ ਸੱਚ ਨਾਮ ਸੱਚ ਦੀ ਗੱਲ ਨਾਮ ਨੇ ਪੀੜੀ ਪਸੰਦ ਲੋ ਵਾਸਪੇ ਨੂੰ ਪਸੰਦ ਆ ਜਾਂਦਾ ਉਹ ਹਰੇ ਓ ਥਿਓ ਪਾਪ ਚ ਜਾਂਦੇ ਬੇਨ ਜਿਹੜੀ ਸਾਗ ਕਮਲਾ ਖਰੀ ਭਰੀ ਕਰਤੀ ਅੱਗੇ ਫੁੱਲ ਸਾਖ ਚੱਲ ਪਈ ਫੁੱਲ ਫਲ ਸ਼ੁਰੂ ਹੋ ਗਏ ਠੀਕ ਹੈ ਜਿੱਥੇ ਕੋਈ ਕਥਨ ਨਾ ਸੁਣਨ ਤੋਂ ਮਾਂ ਪੇਰੀ ਇਹਦਾ ਕੀ ਭਾਵ ਹੈ ਕਿ ਮੈਂ ਉੱਥੇ ਜਾ ਕੇ ਸੁਣਦਾ ਸੁਣਿਆ ਉਥੋਂ ਨਾਮ ਨਾ ਮੇਰੇ ਪਤੀ ਨੇ ਲਿਆ ਸੁਣ ਪਰਮੇਸ਼ਰ ਨੇ ਲਿਆ ਸੁਣ ਵੀ ਇਹ ਨਾਮ ਕਥਨ ਕਰਦਾ ਹੈ ਇਹਦਾ ਮਤਲਬ ਹੈ ਜਾਗ ਪਿਆ ਤਾਂ ਕਿਹਾ ਨਾ ਮੁੱਖ ਨਿਕ្សែ ਰੰਗ ਕਿ ਪੱਕੀ ਪਾ ਨਹੀਂ ਮੇਰੇ ਕੰਨ ਕੋ ਚਾਹੁੰ ਕਬੀਰ ਕਹਿੰਦਾ ਜਾਗ ਪਿਆ ਤੇ ਜਾਗ ਜਾਗ ਤੇ ਕੋ ਜਾਗਤਾ ਮਿਲੇ ਉਹਦਾ ਪਹਿਲੇ ਜਾਗਦਾ ਜਾਗਦੇ ਨੇ ਅੰਦਰ ਸੁਣ ਸਤਗੁਰ ਜਾਗਤਾ ਹੈ ਤੇ ਉਹ ਸਤਗੁਰ ਨੇ ਸੁਣ ਲਿਆ ਉਹ ਕਥਨ ਕਰਦਾ ਪਸੋਂ ਨਾਲ ਬਣਾ ਲਿਆ ਹਰਾ ਹੋ ਗਿਆ। ਹਰੀ ਦਾ ਰੂਪੇ ਹੋ ਗਿਆ ਉਹ। ਮੂੰਹ ਜਲਾਉ ਤਤ ਨਾਨਕ ਪੀਰੀ ਪਸੰਦੋ ਹਰਿਓ ਥਿਓਸ ਇਹ ਹੈ ਤਤ ਸੱਚ ਕਹਿੰਦੇ। ਅੱਛਾ ਦੀ ਗੱਲ ਹੈ ਕਿ ਉਹਦਾ ਅਸਰ ਕਰ ਜਾਂਦਾ। ਇਹਦੇ ਕੋਈ ਦੋ ਰਾਮਾਂ ਦੀ ਵਿਹਾਰ ਉਹਦੇ ਅੰਦਰ ਨਹੀਂ ਕਰਦਾ। ਉਹ ਘਾਰ ਉਹਦਾ ਹੋ ਜਾਂਦਾ। ਇਹਦੇ ਇਹਤੇ ਕੋਈ ਸ਼ੰਕਾ ਵਾਲੀ ਗੱਲ ਨਹੀਂ ਹੈ। ਇਹ ਤੱਥ ਦੀ ਗੱਲ ਹੈ। ਠੀਕ ਹੈ ਜੀ ਤੇ ਫਰੀ ਹਰਿਆ ਭਰਿਆ ਹਰਿਆ ਹਰਿਆ ਭਰਿਆ ਕਰਨ। ਤੁਹਾਨੂੰ ਕੋਈ ਹਰਿਆ ਹੋਇਆ। ਠੀਕ ਹੈ ਜੀ। ਮਹਲਾ ਪੰਜਵਾਂ ਮੇਰੀ ਮੇਰੀ ਕਿਆ ਕਰੈ। निमूनियां दी ਦੇ वेरी मेरी क्या करे ना की करन मेरी मेरी पुत्र कल्तर पुत्र और स्त्री है जड़ी है दे नाल प्रेम है तेरा इठे ही है सारा ध्यान कि तेरे ए मेरी मेरी है और नहीं नाल तेरा परमेश्वर दे प्रेम नहीं नाल तेरा सच दे प्रेम झूठ ना प्रेम ए दे है सने कहंदे ने रे ਨਾਕਲ ਨਾਂ ਬਿਹੂੜੀਆਂ ਐ ਲੋਕ ਤੋਂ ਬਿਹੂੜੀ ਸਖੜੇ ਦੇ ਲੋਕ ਐ ਸਾਰੇ ਪੁੱਤਰ ਕਰਤੱਵ ਦੇ ਰਖਣ ਵਾਲੇ ਸਖੜੇ ਦੇ ਲੋਕ ਤੋਂ ਤੇ ਦੇ ਇਹ ਦੇਹ ਜਿਹੜੀ ਐ ਜਿਹੜੀ ਫਿਰਦੇ ਨੇ ਸਰੀਰ ਉਹਨਾਂ ਕੋਲ ਕੀ ਦਾ ਸਾਕਤਾਂ ਦਾ ਜੂੜੇ ਨੂੰ ਖੇਦੇ ਨੇ ਜਿਹੜਾ ਨੇ ਬੰਦੀ ਬੂੜਿਆ ਤੇ ਬੂੜੇ ਦੇ ਬੁੜੀ ਦੇ ਜਿਹੜੇ ਬੁਢੀ ਲੋਕ ਨੇ ਉਹਨਾਂ ਨੇ ਬੰਦ ਬੁੱਢਣਾ ਸੀ ਕਬੀਰ ਬੰਦ ਬੂੜਿਆ ਨਹੀਂ ਕਿਸ ਬੁਢਾ ਹੈ ਕਾਇ ਇਦੋਂ ਨੇ ਕੇਸ ਬਣਾ ਕੇ ਗੁੜੀ ਬਣ ਕੇ ਲੰਡੀ ਗੁੜੀ ਉਹਨਾਂ ਗੁੜੀਆਂ ਰਹਿ ਗਏ ਉਹਨਾਂ ਦੀ ਦੇਖੀ ਆ ਉਹਨਾਂ ਦੀ ਬਾਹ ਲੀਦੇ ਆ ਉਹ ਰੂੜੀਆਂ ਦੀ ਦੇਹ ਆ ਉਹ ਨਰਾਕਾਰੀ ਹੈ ਉਹ ਬਾਦੋ ਹੁੰਦਾ ਉਹ ਮਿੱਟੀ ਦੇ ਬਾਦੋ ਨਹੀਂ ਬਾਦੋ ਬਾਦੋ ਤਸ਼ਰੂਰ ਕਰਦੇ ਨੇ ਪਰ ਮਿੱਟੀ ਦੇ ਬਾਦੋ ਨੇ ਆਪ ਉਹਨਾਂ ਦੇ ਬਾਦੋ ਵੀ ਮਿੱਟੀ ਦੇ ਨੇ ਆਪੇ ਮਿੱਟੀ ਦੇ ਠੀਕ ਹੈ ਜੀ ਨਾਨਕ ਨਾਮ ਵੀ ਹੋਣੀਆਂ ਨਿਮੂਣੀਆਂ ਦੀ ਦੇਹ ਅਦੇ ਜਈਏ ਪਿੱਟੀ ਨਹੀਂ ਦੇਹੀ ਉਹ ਨਾ ਬਿਉੜਿਆ ਦੀ ਦੇਹੀ ਨਾ ਬਿਉੜਿਆ ਦੀ ਦੇਹੀ ਪਿੱਟੀ ਦੀ ਨੈਣੀ ਦੇਖੂ ਗੁਰਦਰਸ਼ਨੋ ਗੁਰ ਚਰਣੀ ਮੱਥਾ ਪੈਰੀ ਮਾਰਗ ਗੁਰ ਚਲਦਾ, ਪੱਖਾਂ ਫੇਰੀ ਹੱਥਾਂ ਪਾਲਿਆਂ ਘਰ ਨਾਲ ਨਹੀਂ ਗੁਰਦਰਸ਼ਨ ਤਾਂ ਕੱਲ੍ਹ ਨਾਲ ਅਜ਼ਰੀ ਅੱਖਾਂ ਲੈਣ ਲੋ ਨਹੀਂ ਦੇਖੂ ਸ਼ਰਤ ਗੁਰ ਦਾ ਦਰਸ਼ਨ ਤਾਂ ਅੰਦਰੋਂ ਹੋਣਾ ਉਹ ਤਾਂ ਹੋਣਾ ਲੈਣਾ ਨਾਲ ਅੰਦਰਲੀ ਅੱਖ ਨਾਲ ਗੁਰ ਚਲਣੀ ਮੱਥਾ ਜਿਹੜਾ ਮੱਥਾ ਬਣ ਹੈ ਗੁਰ ਚੜ੍ਹਨੋਂ ਲੱਗਿਆ ਹੈ ਮੱਥਾ ਤੇ ਮੱਥਾ ਬਣ ਲਾਸਤਾ ਗੁਰ ਚੜ੍ਹਨਾ ਆ ਜਿਹੜਾ ਬਾਕੀ ਕੰਮ ਹੱਥ ਪੈਰ ਕਰ ਕੰਬ ਸਭ ਪਹਿਲੀ ਮਾਰਗ ਗੁਰ ਚਲਣਾ ਚਲਦਾ ਆ ਜਿਹੜਾ ਬਾਹਲਾ ਹਾਂ ਚਲਦਾ ਆ ਜਿਹੜਾ ਬਾਹਲਾ ਮਾਰਗਾ ਹੈ ਬਾਹਲੇ ਪਹਿਰਨ ਵਾਲੇ ਚਲਦਾ ਜੇ ਗੁਰੂ ਸਾਧਕੁਰ ਕੋਲ ਜਾਣਾ ਮਿਲਣ ਜਾਣਾ ਕਿਸੇ ਕੰਪੇ ਗਿਆ ਇਹ ਬਾਹਲੇ ਸਰੀਰ ਦਾ ਪੱਕਾ ਫੇਰੀ ਹੱਥ ਗੁਰ ਕੀ ਮੂਰਤ ਆ ਕਾਲ ਮੂਰਤ ਹੈ ਕਾਲ ਮੂਰਤ ਤਾਂ ਫਿਰ ਅੰਦਰ ਅੰਦਰੀ ਅੱਖਾਂ ਨਾਲ ਦੇਖੋ ਫਿਰ ਉਹ ਹਿਰਦੇ 'ਚ ਜਿਹੜਾ ਲੈਣੀ ਤਪੂਰ ਦਰਸ਼ਨੂ ਹੈ ਧਿਆਨ ਜਿਹੜਾ ਹੈਗਾ ਹਿਰਦੇ ਵਿੱਚ ਆਪਣੇ ਬੂਲ ਨਾਲ ਜੁੜਿਆ ਹੋਇਆ ਹੈ ਦਿਨ ਰਹਿਣ ਜਪੰਥਾ ਦਿਨ ਰਹਿਣ ਨੂੰ ਸਮਝਦਾ ਰਹਿੰਦਾ ਤੇ ਲੈਣੇ ਆਤਮ ਚਿੱਤ ਕਰਦਾ ਰਹਿੰਦਾ ਛੱਡਿਆ ਸਦਲ અપਾਉਣ ਨੂੰ ਪਰਵਾਸੇ ਗੁਰ ਸੁਭਰਥ ਮੈਂ ਮੈਂ ਕਰ ਦਿੱਤਾ ਸਦਲ ਕੀ અપਾਉਣ ਨੂੰ ਆਪਣੀ ਮਰਜ਼ੀ ਆਪਣੀ ਮਰਜ਼ੀ ਆਪਣੀ ਬੁੱਧੀ ਆਪਣੀ ਐਫਰਟ ਸਭ त्याग ਦਿੱਤੀ ਪਰਵਾਸੇ ਗੁਰ ਸੁਭਰਥ ਕਿਹਦੇ ਪਰਵਾਸੇ ਸਤਗੁਰ ਦੇ ਪਰਵਾਸੇ ਉਹ ਸੁਭਰਥ ਜਿਹੜਾ ਸਤਗੁਰ ਹੈ ਸਭ ਰਾਤ ਗੁਰੂ ਸਰ ਹੱਥ ਧਰਿਓ ਤੇ ਉਹਦਾ ਹੱਥ ਆ ਗਿਆ ਮੈਂ ਸਭ ਆਪਣੀ ਵਸੁੱਟਿਆ ਆਪਣੀ ਬੁੱਧੀ ਤਿਆਗਤੀ ਆਪਣੀ ਇੱਛਾ ਤਿਆਗਤੀ ਆਪਣੀ ਹਉਮੈ ਤਿਆਗਤੀ ਮੈਂ ਕੁਝ ਕਰ ਸਕਦਾ ਸਭ ਖਿਆਲ ਤਿਆਗਤੇ ਤੇ ਗੁਰ ਤੇ ਪ੍ਰੋਸਾ ਰੱਖ ਲਿਆ ਜੀ ਹਾਂ ਮਨ ਕਹਿੰਦਾ ਚਿੱਤ ਨੂੰ ਪਾਣੀ ਚ ਆ ਗਿਆ ਗੁਰ ਕੇ ਪਾਣੀ ਚ ਆ ਗਿਆ ਨਾ ਠੀਕ ਹੈ ਪਰ ਮਨ ਦੀ ਉਹ ਨਾ ਜੀ ਹਾਂ ਉਹ ਛੜਤਾ ਬੇ ਛੜਤੀ ਠੀਕ ਹੈ ਜੀ ਗੁਰੂ ਬਖਸ਼ਿਆ ਨਾਮ ਨਿਧਾਨ ਸਭੋ ਦੁਖ ਲੱਥਾ ਭੋਗੋ ਪੁੰਚੋ ਪਾਈਓ ਪੱਲੇ ਨਾਮ ਅਗਥਾ ਅੱਛਾ ਫਿਰ ਸਤਗੁਰ ਨੇ ਕੀ ਕਿਤਾ ਜੇ ਮੈਂ ਆਪਣਾ ਆਪਾ ਕਿਆ ਕੇ ਸਤਗੁਰ ਦੇ ਬਾਣੀ ਚ ਆ ਗਿਆ ਤਾਂ ਉਧਰੋਂ ਸਤਗੁਰ ਨੇ ਕੀ ਬਖਸ਼ਿਆ ਗੁਰ ਬਖਸ਼ਿਆ ਨਾਮ ਨੇ ਸਭੋ ਸਾਰਾ ਹੀ ਨਾਮ ਨੇ ਦਾਨ ਬਖਸਦਾ ਸਭੋ ਦੁਖ ਲਥਾ ਹੈ ਖਜ਼ਾਨਾ ਐਸਾ ਦਿੱਤਾ ਸਾਰੇ ਦੁਖ ਦੂਰ ਹੋ ਗਏ ਟੋਟਲ ਆਪੇ ਦੂਰ ਹੋ ਗਈ ਹੋ ਗੋ ਹੁਣ ਖਾਓ ਵਿਨੰਦ ਕਰੋ ਪੁੱਛੋ ਵਿਚਾਰੋ ਪੱਲੇ ਨੂੰ ਅਗੱਠਾ ਨਾਮ ਮੈਂ ਤੁਹਾਡੇ ਕੋਲ ਖਾਓ ਖਰਚੋ ਨਾਲ ਮੈਂ ਭਾਈ ਟੋਟਲ ਲਾਵੋ ਵੱਧੋ ਜਾਈ ਉਹ ਖੁੱਲੇ ਖਜਾਨੇ ਦੇ ਇੱਥੇ ਪਰਮੇਸ਼ਰ ਨੇ ਆਹੋ ਖਰਚੋ ਗੁਰਮੁਹਲੀ ਕਿੱਡੀ ਪਈ ਆ ਤੁਹਾਡੇ ਕੋ ਵਿਚਾਰੋ ਤੇ ਉਹ ਚ ਦੁਆਮ ਪਦਾਰਕ ਛਗੋ ਹੋਜੀ ਥੋਗੋ ਪੁੰਚੋ ਪਾਈਓ ਪੱਲੇ ਖਾਣਾ ਪੁਚਣਾ ਹੁੰਦਾ ਹਜਮ ਕਰਨਾ ਜੇ ਕੋ ਖਾਦਾ ਜੇ ਕੋ ਪੁਚਾਏ ਜੇ ਗੱਲ ਸੁਣ ਲਈ ਸਭ ਜਿਲੀ ਹਜਮ ਨਹੀਂ ਨਾ ਹੋਈ ਬੁੱਲੀ ਦੀ ਫਿਰ ਵੀ ਗੱਲ ਦੀ ਬਣਦੀ ਹਜਮ ਤਾਂ ਜਵਨ ਲਈ ਠੀਕ ਹੈ ਹੋਜੀ ਨਾਮ ਦਾਣ ਇਸ਼ਨਾਨ ਦ੍ਰਿੜ ਸਦਾ ਕਰੋ ਗੁਰ ਕਥਾ ਸਹਿਜ ਪਿਆ ਪ੍ਰਭ ਪਾਇਆ ਇਸ਼ਨਾਨ ਪਹਿਲਾਂ ਹੁੰਦਾ ਇਸ਼ਨਾਨ ਕੀ ਹੁੰਦਾ ਇਹਨੂੰ ਸਮਝ ਗੁਰਬਾਣੀ ਦ੍ਰਿੜ ਕਰ ਉਹਨਾਂ ਵਾਲਾ ਨਾਮ ਹੈ ਨਾ ਦਾਣਾ ਨਾ ਇਸ਼ਨਾਨ ਸਾਡੇ ਵੱਖਰੇ ਨੇ ਉਹਨਾਂ ਦੇ ਵੱਖਰੇ ਸਦਾ ਕਰੋ ਗੁਰ ਕਥਾ ਫੇਰ ਸਦਾ ਗੁਰਤੀ ਕਥਾ ਕਰੋ ਗਿਆਨ ਦੀ ਕਥਾ ਉਹ ਨਾਲਾ ਦਾਣ ਛੱਡਦੇ ਹੋ ਉਹ ਨਾਲਾ ਦਾਣ ਕਦੇ ਆਪਣੀ ਕਥਾ ਦੇਣਾ ਕਿਉਂ ਆ ਕਿਉਂ ਇਹ ਦਾਨ ਕਿਹੜਾ ਸਾਡਾ ਦਾਨ ਹੈ ਕਿਹਦੇ ਵਾਸਤੇ ਕਰਨਾ ਆਤਮਿਕ ਵਾਸਤੇ ਕਰ ਗੁਰਮੁਖਾਂ ਦਾ ਦਾਨ ਕਿਹਨਾਂ ਗੁਰਮੁਖਾਂ ਦਾ ਲੋਰ ਦਾਨ ਦੇਖ ਲੋ ਨਾਮੀ ਦਾਨੇ ਨਾਮ ਨਾਲੇ ਇਸ ਲੋਰ ਇਹ ਕਥਨ ਕਰਨਾ ਨਾਮ ਦਾਣ ਗੁਰਮੁਖਾਂ ਦਾ ਇਹ ਨਾਲ ਵਾਲੇ ਦਾਨ ਨਾਮ ਦਾ ਹੀ ਦਾਨ ਹੈ ਨਾਮ ਵਾਲੇ ਗੁਰਮੁਖ ਉਹ ਹੀ ਨਾਮ ਦਾ ਦਦਾ ਵੀ ਵਪਾਰ ਜਿਉਂਦੀ ਜੀ ਖਰੀਦੂ ਉਹੀ ਜੀ ਦਊਗਾ ਠੀਕ ਹੈ ਕਥਾ ਕਹੋ ਹੈ ਜੀ ਸਦਾ ਹਰ ਕੀ ਕਥਾ ਕਰੋ ਹਾਂ ਇਹ ਇਹ ਹਰ ਕੀ ਕਥਾ ਇਹ ਕਥਨ ਕਰੋ ਸਦਾ ਇਹਦੇ ਮੁਤਾਬਕ ਨਹੀਂ ਹੋ ਰਿਹਾ ਇੰਪੋਰਟੈਂਟ ਫੰਕਸ਼ਨ ਹੋ ਰਿਹਾ ਸਾਡੇ ਨਾਮਦਾਨ ਜਿਹੜਾ ਇਸ਼ਾਨਾ ਹਿੰਦੂ ਵਾਲਾ ਹੋ ਰਿਹਾ ਪ੍ਰਚਾਰ ਪ੍ਰਚਾਰ ਚੋਂ ਗਾਇਬ ਹੋ ਗਿਆ ਹੈ ਗਾਇਬ ਨਹੀਂ ਸੀ ਹੁਣ ਤੇਰਾ ਹੁਕਮ ਸੀ ਇਹ ਕਥਾ ਕਰਿਓ ਇਹੀ ਕਥਨ ਕਰਿਓ ਛੱਡ ਦਿੱਤਾ ਛੱਡ ਸਹਿਜ ਭਿਆ ਪਰ ਪਾਇਆ ਜੰਮ ਕਾ ਪੌ ਲਥਾ ਤਾਂ ਜਦ ਦੇ ਜਾ ਕੇ ਬਲ ਟਿਕੂਗਾ ਫਿਰ ਪ੍ਰਭ ਦੀ ਪ੍ਰਾਪਤੀ ਆਪਣੀ ਮੂਰਤ ਦੀ ਪ੍ਰਾਪਤੀ ਹੈ ਤਾਂ ਜੰਮ ਦਾ ਦੂਰ ਹੋਊਗਾ ਇਸੇ ਕਰਕੇ ਸਹਜ ਦੀ ਕਿਸੇ ਨੂੰ ਮਿਲ ਰਿਹਾ ਆਪਣਾ ਬੂਲ ਨਹੀਂ ਨਾਲ ਨਹੀਂ ਕੋਈ ਜੁੜ ਰਿਹਾ ਔਰ ਜੰਮ ਦਾ ਦੂਰ ਨਹੀਂ ਹੋ ਰਿਹਾ ਜੇ ਅਸੀਂ ਕਥਨ ਕਰਨ ਤੋਂ ਅਗਿਆ ਕੀਤੀ ਹੈ ਤਾਂ ਉਹਦਾ ਰਿਜ਼ਲਟ ਵੀ ਸਾਡੇ ਸਾਹਮਣੇ ਇੱਕ ਆਦਮੀ ਬਾਹਰ ਖੜੀ ਕਰਕੇ ਕਹੇ ਕਿ ਆ ਮੇਰਾ ਸਹਜ ਹੋ ਗਿਆ ਜਾਬਦਾ ਪਉ ਚਲਿਆ ਗਿਆ ਤੇ ਆ ਪ੍ਰਭ ਕੋ ਪਾ ਲਿਆ ਜੇ ਨਾਮ ਦਾ ਨਿਸ਼ਾਨਤੀ ਤੁਸੀਂ ਵਿਆਖਿਆ ਬਦਲਤੀ ਤਾਂ ਉਤੋਂ ਵੀ ਕਾਬੀ ਕੋ ਭੁਲੀ ਪੁੱਠੇ ਪਾਸੇ ਨੂੰ ਮਿਲਦਾ ਵੀ ਕੁਛ ਨਹੀਂ ਕਿਸੇ ਨੂੰ ਠੀਕ ਹੈ ਜੀ ਗੁਰਮਤਿ ਚੋਂ ਹੀ ਸਮਝਣੀਆਂ ਸੀਗੀਆਂ ਇਹ ਸਾਰੀਆਂ ਚੀਜ਼ਾਂ ਹੈ ਜੀ ਹੁਕਮ ਹੈ ਸਾਨੂੰ ਨਾਲੇ ਹੁਕਮ ਕਹਿੰਦੇ ਹੁਕਮ ਨਾਉਂ ਕਹਿੰਦੇ ਨਾਲੇ ਤੁਲੇ ਕੋਈ ਨਹੀਂ ਤੇ ਆਣੇ ਨਹੀਂ ਹੈਗਾ ਹੁਕਮ ਹੈ ਕੀ ਠੀਕ ਹੈ ਜੀ ਇੱਥੇ 20ਵੀਂ ਪੌੜੀ ਦੀ ਸਮਾਪਤੀ ਹੈ ਜੀ। ਹਾਂ ਜੀ।